ਜੇ ਲੋਕ ਮਹੱਲਾ ਦੀਆ ਹਮੇ ਮਮਤਾ ਮੋਹਣੀ ਮਨੁੱਖਾ ਨੂੰ ਗਈ ਖਾਏ ਜੋ ਮੋਹ ਦੂਜੇ ਚਿਤ ਲਾਏਂਦੇ ਤਿਨਾਂ ਵਿਆਪ ਰਹੀ ਲਪਟਾਏ ਉਹ ਮੇ ਜਿਹੜੀ ਮਕੂਤਾ ਬੋੜੀ ਬੋੜੀ ਹੈ ਜਦੋਂ ਉਹ ਕਾਲੂ ਖਾ ਜਾਂਦੀ ਹੈ ਆਪਣਾ ਸ਼ਰੀਰ ਜਿਹੜਾ ਹੈਗਾ ਅਸਲ ਦੇ ਵਿੱਚ ਇਹੀ ਗੋਬਤਾ ਨਾ ਕਾਰਨ ਸਰੀਰ ਤਾਂ ਰਹੇਗਦੀ ਹੈ ਔਲਾਦ ਦੀ ਬੁੱਧਤਾ ਜਿਹੜੀ ਆਪਾਂ ਬੋਲਦੇ ਨਾ ਔਲਾਦ ਨੂੰ ਬੁੱਧਤਾ ਗਲਤ ਹੈ 24 ਦਾ ਬਿਆਹ ਆਈ ਦੀ ਸਰੀਰ ਨਾਲ ਜੁੜਿਆ ਰਿਹਾ ਸਰੀਰ ਦੀ ਲੋੜਾਂ ਚ ਆਪਣੀ ਵਿੜਾਈ ਤੇ ਦੁਨਿਆਵੀ ਗੱਲਾਂ ਚ ਸਾਰੀ ਬੁੱਧੀ ਖਾ ਗਈ ਅਕਲ ਜਿਹੜੀ ਪਹਿਲੀ ਗੱਲ ਸੀ ਘੜਿਆਂ ਚ ਰਿਆ ਲੋਕਾਂ ਨੇ ਬੈਸ ਬਵਾਸੇ ਚ ਪਿਆ ਰਿਆ ਵਿਚਾਰ ਕੀਤੇ ਦੀ ਚਰਬ ਵਿਚਾਰ ਕੀਤੇ ਦੀ ਖੋਜੀ ਉਪਜਾਣ ਖੋਜ ਕੀਤੀ ਦੀ ਪਾਦੀ ਪਹਿਲੀ ਛੇ ਕਰ ਉਹ ਜੰਦੀ ਰਹੀ ਸਰਬ ਖਾਲੂ ਅਸੀਂ ਕਦੇ ਖਾਧੀ ਹਾਂਜੀ ਫਰੀਰ ਕਰਕੇ ਖਾਧੀ ਕਾਦੇ ਦੀ ਗੱਲ ਐ ਜੋ ਬੁੱਧੀ ਜੀ ਪਹਿਲਾਂ ਲੈ ਕੇ ਆਇਓ ਵੀ ਸਾਜੀ ਠੀਕ ਮਤ ਮਾਰੀ ਗਈ ਠੀਕ ਹੈ ਜੀ ਜੋ ਮੋਹ ਦੂਜੇ ਚਿਤ ਲਾਏਂਦੇ ਤੈਨਾ ਵਿਆਪ ਦੂਜੇ ਪਾਸੇ ਲੱਗ ਜਾਂਦਾ ਕੋਈ ਦੇ ਨਾਮ ਆਆਂ ਲਪਟੇ ਰਹੇ ਤੇ ਉਹ ਨਹੀਂ ਜਾਂਦੇ ਉਹ ਨਹੀਂ ਚੱਲ ਸਕਦੇ ਚਾਹੇ ਕੁਝ ਵੀ ਹੋਵੇ ਗੁਰ ਹੈ ਤਾਂ ਇਹ ਵਿੱਚੋਂ ਜਾਏ ਗੁਰਕੇ ਸ਼ਬਦ ਪਰਜਾਲੀ ਹੈ ਜੇ ਗੁਰਕੇ ਸ਼ਬਦ ਦੇ ਨਾਲ ਇਹਨੂੰ ਪਰਜਾਲੀਏ ਪਰਜਾਲੀਆ ਹੈ ਜਿਹੜੇ ਇਹਨੂੰ ਜਾਨਣਾ ਪਰਜਾਲ ਜਦੋਂ ਉਹਦੇ ਤੇ ਹੋਰ ਰੋਸ਼ਨੀ ਨਿਕਲਦੀ ਹੈ ਪਰਜਾਲਣ ਤੇ ਬਾਅਦ ਉਹ ਰੋਸ਼ਨੀ ਨਿਕਲਦੀ ਹੈ ਜੇ ਤੇ ਰੋਸ਼ਨੀ ਪਾਈਏ ਐਂ ਕਹ ਰੋਸ਼ਨੀ ਪਾਈਏ ਗੁਰਕੇ ਸ਼ਬਦ ਨਾਲ ਉਹਨੂੰ ਰੋਸ਼ਿਤ ਕਰੀਏ ਫਿਰ ਆਏ ਇਹ ਵਿੱਚੋਂ ਜਾਏ ਤਾਂ ਬਚੇ ਜਾਂਦੀ। ਜੇ ਗੁਰਦੇ ਉਪਦੇਸ਼ ਨਾਲ ਸਭ ਜਾਣ ਦੀ ਕੋਸ਼ਿਸ਼ ਕਰੀਏ ਤਾਂ ਜਿੰਦੀ ਹੈ। ਸੁਭ ਜੀ ਇਹਨੂੰ ਜਿੰਨੀ ਤਰ੍ਹਾਂ ਗੁਰਪ੍ਰਦੇਸ਼ ਨਾਲ ਤਰ੍ਹਾਂ ਸਮਝੀਏ ਫਿਰ ਜਾਂਦਾ। ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖੀ ਪਾਇਆ ਜਾਏ। ਤਨ ਮਨ ਹੋਵੇ ਉਜਲਾ ਆਹ ਤਾਨਾ ਔਰ ਮਾਨ ਜਿਹੜਾ ਹੈਗਾ ਉੱਕੜ ਵਾਲੇ ਦੇ ਹਾਂਜੀ ਇਹਦਾ ਬੁੱਧਵਾਰ ਅੰਤਲੇ ਤਨਮੰਤੀ ਗੱਲ ਹੈ ਬਾਹਰ ਔਰ ਮਾਨ ਉਜਲਾ ਹੋ ਜਾਂਦਾ ਹੈ ਸੁਲੀਨਤਾ ਚਲੀ ਜਾਂਦੀ ਹੈ ਤਾਨ ਔਰ ਮਨ ਕਰਦੇ ਹਿਰਦੇ ਚੋਂ ਔਰ ਦੂਰ ਹੋ ਜਾਂਦੀ ਹੈ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬੜਿਆ ਉਹ ਉਜਲਾ ਨਾ ਕੋ ਸਵਾਨਾ ਇਹ ਜਨ ਲੋਭ ਬਚਨ ਦੇ ਬੰਦੇ ਵਿੱਚ ਤਾਂ ਅਗਿਆਨਤਾ ਦੂਰ ਹੋ ਜਾਂਦੀ ਹੈ ਨੇੜਾ ਦੂਰ ਹੋ ਜਾਂਦਾ ਹੋਜੀ ਗੁਰਮੁਖੀ ਪਾਇਆ ਜਾਏ ਨਾਨਕਾ ਮਾਇਆ ਦਾ ਮਾਇਆ ਜੇ ਮਾਰਨੀ ਹੋਵੇ ਅੰਦਰੋਂ ਇਹਦਾ ਮਾਰਨ ਕੀ ਹੈ ਹਰ ਲੋਭ ਹੈ ਕਿ ਦਾ ਜਿਹੜਾ ਨਾਮ ਹੈ ਨਾ ਗਿਆਨ ਇਹ ਮਾਇਆ ਨੂੰ ਮਾਰ ਦਿੰਦਾ ਮਾਇਆ ਦੀ ਬਨੌਤ ਮਰ ਜਾਂਦੀ ਆ ਅੰਦਰੋਂ ਮਾਇਆ ਫਿਰ ਕੁਛ ਵੀ ਨਹੀਂ ਰਹਿੰਦੀ ਮਾਇਆ ਭਸਦੀ ਐ ਜੋ ਇੱਕ ਝੂਠਾ ਹੋ ਜਾਂਦਾ ਹੈ ਸੁਪਨਾ ਬਣ ਜਾਂਦਾ ਫਿਰ ਸੁਪਨਾ ਹਰ ਹੈ ਮਾਇਆ ਦਾ ਬਾਣ ਗੁਰਮੁਖੀ ਪਾਇਆ ਜਾਏ ਇਸ ਗੱਲ ਦਾ ਪਤਾ ਗੁਰਮੁਖਾ ਤੋਂ ਲੱਗਦਾ ਹੈ ਆਪ ਗੁਰਮੁਖ ਬਣ ਕੇ ਤਾਂ ਹਰ ਪਾਇਆ ਜਾ ਸਕਦਾ ਹੈ ਗੁਰਮੁਖੀ ਪਾ ਜਾਏ ਗੁਰਮੁਖੀ ਹੋ ਜਵੇ ਜੇ ਆਪ ਹਾਂਜੀ ਤਾਂ ਪਾ ਲਵੇ ਠੀਕ ਹੈ ਜੀ ਮਹਲਾ ਤੀਜਾ ਇਹ ਮਨ ਕੇਤੜਿਆ ਜੁਗ ਭਰਮਿਆ ਫਿਰ ਰਹੇ ਨਾ ਆਵੇ ਜਾਏ ਇਹ ਜਿਹੜਾ ਬੋਲ ਕੇਤੜੇ ਨੂੰ ਜੁਗ ਉਹ ਕੇਤੜੇ ਨੂੰ ਜੁਗ ਕਹਿੰਦਾ ਇਹ ਤਾਂ ਇਹ ਤਾਂ ਇਹ ਤਾਂ ਜੋ ਕਿ ਨੂੰ ਕਹਿੰਦੇ ਨੇ ਕਰੋੜਾਂ ਵਰ੍ਹੇ ਤੱਕ ਅਰਬਾਂ ਖਰਬਾਂ ਸਾਲ ਤੱਕ ਇਹ ਮਨ ਪਰਪਰਦਾ ਰਹੇ ਹ ਜਦ ਦੀ ਦੁਨੀਆ ਬਣੀ ਹੋਈ ਹੈ ਜਿਵੇਂ ਕਹਿੰਦੇ ਨੇ ਬਣੀ ਹੋਈ ਹੈ ਦੁਨੀਆ ਜੀਵ ਜੰਦੇ ਹੈਗੇ ਨੇ ਭਰਮ ਟਾਈ ਵਰਦਾ ਵਿਚਾਰਾ ਇਤਨੇ ਆ ਯੁੱਗ ਭਰਦੇ ਹੋ ਫਿਰ ਰਹੇ ਨਾ ਆਵੇ ਜਾਏ ਫਿਰ ਨਹੀਂ ਰਹਿੰਦਾ ਇੱਕ ਜਗ੍ਹਾ ਆਵੇ ਜਾਏ ਕਦੇ ਕੋਈ ਸੀਰ ਢਾਲ ਕਰ ਲੈਂਦਾ ਕਦੇ ਕੋਈ ਸੀਰ ਢਾਲ ਕਰ ਲੈਂਦਾ ਜੀਤ ਹਾਲ ਕਰਕੇ ਕਿਹਾ ਟਿਕਦਾ ਤੇ ਚੋਗਾ ਚੁਗਦਾ ਫਿਰਦਾ ਠੀਕ ਹੈ ਜੀ ਇੱਥੇ ਨਨਾ ਜਿਹੜਾ ਹੈਗਾ ਬੜਾ ਇੰਪੋਰਟੈਂਟ ਹੈ ਜੀ ਥਿਰ ਰਹੇ ਨਾ ਆਵੇ ਜਾਏ ਇਸ ਤਰ੍ਹਾਂ ਪੜਾਂਗੇ ਜੀ ਫਿਰਦੀ ਦਾ ਇਹ ਹਾਂ ਨਹੀਂ ਤਾਂ ਜੇ ਆਪਾਂ ਪੜ ਲਈਏ ਥਿਰ ਰਹੇ ਨਾ ਆਵੇ ਜਾਏ ਜੇ ਥਿਰ ਨਹੀਂ ਰਹਿ ਰਿਹਾ ਤਾਂ ਆਉਂਦਾ ਜਾਂਦਾ ਹੈ ਨਾ ਜੀ ਜੇ ਟਰੈਕ ਦੀ ਸਮਝ ਦੀ ਗੁਰਬਾਣੀ ਦੀ ਅੰਤਾਈ ਜਾਸ 11 ਬਗਰ ਜਾ ਕੇ ਬੰਦੀ ਦੀ ਅਰਥ ਆ ਸਕਦੇ ਦੋ ਅਰਥ ਬੰਦਗੇ ਤੁਹਾਡੇ ਜੇ ਦੂਆ ਤੋਂ ਲਾ ਲਈਏ ਅਰਥ ਹੋਰ ਬੰਦਗੇ ਹਾਂਜੀ ਫਿਰ ਰਹੇ ਨਾ ਆਵੇ ਜੇ ਕਰੀਏ ਫਿਰ ਕਿੱਡਰਿਆਂ ਜੋ ਪੰਕਤੀ ਪਹਿਲੀ ਪੰਕਤੀ ਪੰਕਤੀ ਦੇ ਖਿਲਾਫ ਹੋ ਜਾਣਗੇ ਅਰਥ ਅੱਖਾਂ ਵਿੱਚ ਕਿਹਨੇ ਅਰਥ ਕੀਤੇ ਜਾ ਸਕਦੇ ਪਹਿਲੀ ਅੰਦੀ ਪੰਕਤੀ ਦੇ ਅਰਥ ਚਲੇ ਗਏ ਠੀਕ ਹੈ ਜੀ ਪੜਾਂਗੇ ਨਾ ਆਵੇ ਜਾਏ ਮੁਝਬੂਰੀ ਇਹ ਹੀ ਪੜਨਾ ਪਊਗਾ ਠੀਕ ਹੈ ਜੀ ਪਹਿਲੀ ਅੰਦੀ ਪੰਕਤੀ ਮਜਬੂਰ ਦੇ ਅਰਥ ਨਹੀਂ ਕਰ ਸਕਦੇ ਤੁਸੀਂ ਗੁਰਬਾਣੀ ਦੇ ਇਹ ਜਿਹੜੇ ਵਿਦਵਾਨ ਉਹ ਮੂਰਖ ਨੇ ਵਿਦਵਾਨ ਤਾਂ ਹੀ ਨਹੀਂ ਅਰਥ ਹੋਏ ਗੁਰਬਾਣੀ ਤਾਂ ਐਸੀ ਹੈ ਹਿਲੜ ਹੈ ਕਿਸੇ ਪਾਸ ਨੂੰ ਤੁਹਾਨੂੰ ਇਹਦੀ ਭਾਸ਼ਾ ਐਸੀ ਹੈ ਇਸ ਤਰੀਕੇ ਨਾਲ ਲਿਖੀ ਹੋਈ ਹੈ ਤਾਂ ਹਵਾ-ਸਮਾਨ 흘ਣ ਦਿੱਤੀ ਹੋਈ ਦੀ ਕਿਸੇ ਪਾਸੇ ਅਰਥ ਕਰਨ ਦੇ ਪੈਣਗੀ ਤੁਸ ਠੀਕ ਹੈ ਜੀ ठीक है थी। जी, ਤਾਂ ਪਰਮਾਯਨ ਕਰ ਪਰਪੰਚ ਖੇਲ ਉਪਾਈ ਪਰਵੇ ਇਹ ਕਹਦੇ ਨੇ ਹਰ ਕੇ ਭਾਣੇ ਚ ਪਰਵੇ ਨੇ ਅਰ ਭਾਣਾ ਤਾਂ करि परपंच खेल उपाय परपंच हैगा आ मायादा पंच है जन्ना सारा मायादा परपंच है जो है है। लंगर चलाउने गुरुद्वारे बनाउने धर्म ते काम करने सारे परपंच ने नाम तो बिना सारा परपंच नाम नो शब्द बिना जो भी कुछ धर्म ते रूप ते सब परपंच है जिवे ਸਰੀਰ ਹੈ ਸਰੀਰ ਦੇ ਨੋਹ ਵੀ ਨੇ ਉਗਲਾ ਵੀ ਨੇ ਹੱਥ ਵੀ ਪੈਰ ਵੀ ਸਭ ਸਾਰਾ ਸਟਰਕਚਰ ਹੈ ਸਰੀਰ ਦਾ ਆਤਮਾ ਤੇ ਬਿਨਾ ਸਾਰਾ ਹੀ ਪਰਪੰਚ ਡੈਡ ਬੋਡੀ ਆਤਮਾ ਦਾ ਵਿਚ ਨਾਮ ਹੈ ਦਾ ਨਾਮ ਹੈ ਸੰਸਾਰ ਚ ਜੇ ਸੱਚੇ ਤੁਸੀਂ ਬਾਕੀ ਦਾ ਪਰਪੰਚੇ ਰਹਿ ਗਿਆ ਇਹ ਪਰਪੰਚ ਖੇਡ ਨਚਾਇਆ ਹੈ ਇਹ ਪਰਪੰਚ ਵਿੱਚੋਂ ਗਿਆਨ ਲੈਣਾ ਆਪਾਂ ਸਭ ਆਪਣਾ ਆਪਣਾ ਆਪਾ ਸਰਪੰਚ ਬਿਨਾ ਸਮਝਦੀ ਉਹਦੀ ਬਲੈਕਬੋਰਡ ਕਾਹਦੇ ਰੱਖੇ ਨੇ ਕੂਲਾ ਚ ਕਿਤਾਬਾਂ ਤਾਂ ਹੈਗੀਆਂ ਇਹਨੇ ਬਲੈਕਬੋਰਡ ਦੀ ਕੀ ਲੋੜ ਪਈ ਹੈ ਕੁਝ ਸਮਝਾਉਣ ਵਾਸਤੇ ਇਹਦੇ ਉਹ ਬਣਾਉਣੇ ਖੇਲ ਹੈ ਸਾਰਾ ਇਹ ਬੁੱਧੀ ਪੁੱਠੇ ਕੰਮ ਕਰਕੇ ਵੀ ਲੋਕ ਦੇਖਦੇ ਨੇ ਸਿੱਧੇ ਕਰਕੇ ਵੀ ਦੇਖਦੇ ਨੇ ਦੁਕਸਾਨ ਕਰਕੇ ਵੀ ਦੇਖਦੇ ਨੇ ਡਿਗ ਡਿਗ ਕੇ ਸੱਟਾਂ ਖਾ ਕੇ ਵੀ ਅਕਲ ਆਉਂਦੀ ਹੈ ਇਹ ਪ੍ਰੈਕਟੀਕਲ ਦੇ ਵਿੱਚੋਂ ਅਕਲ ਆ ਰਹੀ ਹੈ ਪ੍ਰੈਕਟੀਕਲ ਦੇ ਵਿੱਚੋਂ ਹਰ ਕੋਈ ਮੰਨ ਜਾਂਦਾ ਜਿਵੇਂ ਗੁਰਬਾਣੀ ਕਹਿੰਦੀ ਐ ਲੋ ਕਈ ਉਹ ਗੱਲ ਤਾਂ ਕੋਈ ਮਿਲਦਾ ਬੁੱਧਾ ਜਾਂਾ ਹੁੰਦਾ ਜਿਹੜਾ ਉਹ ਬੁੱਧਾ ਪ੍ਰੈਕਟੀਕਲ ਸੱਟਾਂ ਖਾ ਕੇ ਖਾਣੇ ਸਿਆਣੇ ਹੋ ਜਾਂਦੇ ਨੇ ਕਿ ਪਰਪੰਚ ਪ੍ਰੈਕਟੀਕਲ ਐ ਇਹ ਸਿਆਣੇ ਕਰਨ ਵਾਸਤੇ ਐ ਪਰ ਕਈ ਇਹੋ ਜਿਹੀ ਪੁੱਠੇ ਹੋ ਜਾਂਦੇ ਨੇ ਕਈ ਜੇੜ ਜਾ ਕੇ ਹੋਰ ਵਿਗੜ ਜਾਂਦੇ ਨੇ ਜਿਹੜੂ ਦੀ ਵੀ ਅਨਸਾਰੀ ਸਿੱਧੇ ਹੋ ਜਾਂਦੇ ਨੇ ਜਿਆ ਹਰ ਬਖਸ਼ੇ ਤਾਂ ਗੁਰ ਮਿਲੈ ਅਸਥਿਰ ਰਹੇ ਸਮਾਏ ਜਿਆ ਹਰ ਬਖਸ਼ੇ ਉਹ ਕਹਿੰਨੇ ਅਸਰ ਨਾਲ ਹਿਲੇ ਬਲਾਏ ਕਰਤਾ ਹੋਇਆ ਨਾ ਇਹ ਅਸਰ ਆਇਆ ਹੋਇਆ ਲਫਜ਼ਾ ਇੱਕ ਇੱਥੇ ਇਹ ਲਫਜ਼ਾ ਆਇਆ ਹੈ ਅਸਰ ਆਇਆ ਹੈ ਲਫਜ਼ ਹੋ ਰਿਹਾ ਆਇਆ ਖਾਲਸਾ ਤਾਹੇ ਦਿਖਾਲ ਸੱਚ ਦਿਖਾਲ ਸਲਫਜ਼ ਵਰਤਿਆ ਤੇ ਇਹ ਦੋ ਲਫਜ਼ਾਂ ਨੇ ਬੜਾ ਭੱਬਲ ਪੂਸਾ ਪਾਇਆ ਵਿਦਵਾਨਾਂ ਨੂੰ ਇੱਕ ਪਾਸੇ ਖਾਲਸਾ ਇੱਕ ਪਾਸੇ ਨੀ ਖਾਲਸਾ ਵਰਤਦਾ ਉਹਨਾਂ ਸੰਸਾਰ 'ਚ ਕੁਝ ਵੀ ਖਾਲਸ ਦੀ ਹੈ ਸੱਚ ਖਾਲਸ ਹੈ ਆਸਰਾ ਦੇ ਆਲੇ ਉਹਨਾਂ ਦਾ ਮਾਇਆ ਲੱਗੀ ਹੈ ਇਨਸਾਨ ਸਾਹਿਬ ਬਾਹਾਂ ਜੁ ਕੋਈ ਛਿਪੀ ਫਿਰਦੀ ਹੈ ਜਿਨਾ ਜਦ ਸਾਡਾ ਸਰੀਰ ਹੈ ਨਾ ਉਹਨਾਂ ਜਦ ਪਰਮਾਨੁਕਤ ਹੋਇਆ ਦੇ ਵਿੱਚ ਇੱਕ ਪੱਥਰ ਦੀ ਪੂਰਤੀ ਰੱਖਤੀ ਅਸੀਂ ਤੇ ਕੋਈ ਬੈਗ ਪਿਆ ਬਿਸਤਰਾ ਤੇ ਉਹ ਫਿਰ ਹੈ ਉਹ ਉਹ ਫਿਰ ਹੁੰਦਾ ਹੋਇਆ ਵੀ ਅਸਥਿਰ ਹੈ ਕਿਉਂਕਿ ਰੇਲ ਜੋ ਗੱਡੀ ਚੱਲ ਰਹੀ ਹੈ ਸੰਸਾਰ ਦੇ ਵਿੱਚ ਅਸੀਂ ਫਿਰ ਹੁੰਦੇ ਵੀ ਅਸਥਿਰ ਹੈ ਜੋ ਜ਼ਾਰਜੋ ਕੋ ਬੁਰੇ ਹਜ਼ਾਰਾ ਜਬੀਰ ਜੋ ਕੋ ਬੁਰੇ ਹੈ। ਇਹ ਲਫ਼ਜ਼ ਵਰਡ ਦੀ है, ਵਿੱਚ ਹੋ ਹੀ ਨਹੀਂ ਸਕਦਾ। ਗੂਰਖਾਂ ਦੇ ਪਾਇਆ ਹੋਇਆ। ਇਹ ਮੂਵੇਬਲ ਸ਼ਬਦ ਵਰਡ ਦੀ ਡਿਕਸ਼ਨਰੀ ਦਾ ਸ਼ਬਦ ਨਹੀਂ ਹੈ। ਕਿਉਂਕਿ ਵਰਡ ਵਿੱਚ ਉਹ ਵੀ ਜੋ ਜਿਹੜੀ ਇੱਕ ਹੋ ਕੇ ਉੱਗੀ ਹੋਈ ਹੈ ਉਹ ਉਹਦੇ ਵਾਸਤੇ ਇੱਕਾਈ ਜਿਹੜੀ ਇੱਕ ਹੋ ਕੇ ਉੱਗੀ ਹੋਈ ਹੈ ਔਰ ਸਰੀਰ ਤੋਂ ਬਾਹਰ ਹੈ ਤੇ ਹੈ ਦੀ ਉਹਦੇ ਜਿੰਨਾ ਜਿਹੜੀ ਉੱਗੀ ਹੋਈ ਹੈ ਦੇ ਆ ਤਾਂ ਬਦਲ ਰਹੀ ਹੈ ਆਕਾਸ਼ ਉਹੀ ਜਗਾ ਬਦਲੀ ਜਾ ਰਹੀ ਹੈ ਆਕਾਸ਼ ਚੜ ਬਦਲੀ ਜਾ ਰਹੀ ਹੈ ਚੜਦਾ ਆ ਗਮਲੇ ਚ ਲੱਗੀ ਹੋਈ ਹੈ ਪੌਦਾ ਖੜਾ ਗਮਲੇ ਦੇ ਵਿੱਚ ਹੈ ਗਵਰਨਰ ਨੂੰ ਕਿੱਥੇ ਦੇ ਦੇ ਰੱਖ ਲਈਏ ਇੱਕ ਪੌਦਾ ਜ਼ਮੀਰ ਚ ਇੱਕ ਪੌਦਾ ਗੱਲ ਲੈ ਕੇ ਹੈ ਕਿਤਾ ਗੱਲੇ ਵਾਲਾ ਪੌਦਾ ਹੈ ਜੇ ਵਿਦਵਾਨਾਂ ਗੱਲਾਂ ਨੇ ਕੁਰਬਾਨੀ ਆਕਾਸ਼ ਨਾਲ ਜੁੜੀ ਹੋਈ ਹੈ ਸੋ ਗੱਲਾਂ ਆਕਾਸ਼ ਕੀ ਵਿਦਾ ਗੱਲਾਂ ਨੇ ਕਾਸ਼ ਬਾਣੀ ਕੀਟਾਂ ਕੀੜੇ ਵਿਦਵਾਨ ਲੱਤਾਂ ਨਾ ਚੱਲਣ ਵਾਲਾ ਰੀਸ ਜਾਂ ਲੀਡਰ हंसा ਨੇ ਇੱਕ ਦਰੰਦੇ ਆ ਬੱਗਾ ਵੀ ਆਇਆ ਚੋ ਉੜੂ ਹੋਏ ਬਗ ਬਪੜੇ ਚਰਤਾਲ ਉੱਪਰ ਪਾਉ ਉੱਠੇ ਹੋਗੇ ਨਾ ਉੱਠੇ ਅਰਥ ਕਰਤੇ ਸਾਰੀ ਗੁਰਬਾਣੀ ਦੇ ਬੰਗਲਿਆ ਨੇ ਉੱਠੇ ਅਰਥ ਕਰਤੇ ਵੀ ਕਹੀ ਜਿਆ ਹਰ ਬਖਸ਼ੇ ਤਾਂ ਗੁਰ ਮਿਲੈ ਅਸਥਿਰ ਰਹੇ ਸਮਾਏ फेर ਹੁੰਦਾ ਹੋਇਆ ਹੈ ਵੀ ਅਸਰ ਅਡੋਰ ਹੁੰਦਾ ਹੋਇਆ ਵੀ ਡੋਲਦਾ ਕਿਉਂਕਿ ਸਰੀਰ ਹੈ ਨਾ ਸਰੀਰ ਦਾ ਇਧਰ ਉਧਰ ਹਿਲਦਾ ਸੁਬਾਇਆ ਹੋਇਆ ਵੀ ਅਸਰ ਵੀ ਆ ਅੱਡ ਅੱਡ ਉਹ ਅਸਰ ਉਡਾਰੀਆਂ ਮਾਰਦਾ ਆਕਾਸ਼ ਇਹ ਹਿਰਦਾ ਝੰਡ ਕੇ ਨਹੀਂ ਜਾਂਦਾ ਕਿਤੇ ਬਾਹਰ ਕਿਤਨੀ ਇਕਤਾ ਭੰਗ ਨਹੀਂ ਹੁੰਦੀ ਪਰ ਇਸ ਤਰ੍ਹਾਂ ਅਸਰ ਕਿਉਂ ਆ ਕਿਉਂਕਿ ਸਰੀਰ ਦੀ ਪੋਜੀਸ਼ਨ ਆਕਾਸ਼ ਬਦਲਦੀ ਹੈ पांच किने ਘਟਿਆ ਦੀ ਹੋਇਆ ਨਾਨਕ ਮਨ ਹੀ ਤੇ ਮਨ ਮੰਨਿਆ ਨਾ ਕਿਛ ਮਰੇ ਨਾ ਜਾਏ ਨਾਨਕ ਮਨ ਹੀ ਤੇ ਮਨ ਮੰਨਿਆ ਨਾਨਕ ਕਹਿੰਦਾ ਜਿਹੜਾ ਅੱਲਾਹ ਮੰਨਣਾ ਅੱਲਾਹ ਮਨ ਨਹੀਂ ਆਪਣੇ ਮਨ ਨੂੰ ਬਣਾਇਆ ਉਹ ਦੀ ਤੇ ਮਨ ਬੋਦੀ ਪਰ ਦੋਨੇ ਨਾ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ ਮਾਨ ਨੇ ਹੀ ਨੇ ਇਹਨੇ ਮਨੂ ਬਣਾਇਆ ਜਦ ਵੀ ਬਣਾਇਆ ਜੇ ਪੁੱਠਾ ਕੰਮ ਕਰਾਇਆ ਤਾਂ ਨੈਗੇਟਿਵ ਮਾਨ ਨੇ ਪੋਜ਼ਿਟਿਵ ਮਨੂ ਬਣਾ ਕੇ ਕਰਾਇਆ ਚਾਹੇ ਨੈਗੇਟਿਵ ਕੰਮ ਹੋਇਆ ਚਾਹੇ ਸਭ ਬੜਾ ਭਾਈ ਆ ਦੂਹਾ ਕਦੇ ਛੋਟੇ ਭਾਈ ਦੀ ਮਨ ਲੱਗੇ ਪੁੱਠਾ ਕੰਮ ਹੋ ਗਿਆ ਉਹਨੇ ਛੋਟੇ ਨੇ ਬਣਾ ਲਿਆ ਕਦੇ ਬੜੇ ਨੇ ਬਣਾ ਲਿਆ ਤਾਂ ਕੰਮ ਸਿੱਧਾ ਹੋ ਗਿਆ ਉਹ ਬੜੇ ਦਾ ਬਣਾਇਆ ਹੋਇਆ ਅਸਰ ਹੋਇਆ ਕਿਹਿਆ ਹੋਇਆ। ਜਾਂ ਬੜਾ ਬਣਾ ਲੂ ਬੜੇ ਦੀ ਗੱਲ ਬੰਦ ਲੂਗਾ ਬੜੇ ਕੀਆਂ ਬੜਈਆਂ। ਕਿਹ ਕਹਿਣਾ ਕਰਨ ਲੱਗ ਜੂ ਉਸੇ ਵਾਸਤੇ। ਫਿਰ ਬੜੇ ਨੂੰ ਆਪਣੀ ਗੱਲ ਹੀ ਕਹੂਦਾ। ਠੀਕ ਹੋ ਜਾਂਦਾ। ਫਿਰ ਥੇ ਵੀ ਕਹਿਣਾ ਫਿਰ ਕਹਿੰਦਾ ਨਹੀਂ ਉਹ ਵੇਰੇ ਵਾਲੀਆਂ ਗੱਲਾਂ 'ਚ ਦੁੱਖ ਹੈ। ਸਮਝ ਲੈਦਾ ਜੋ ਵੀ ਗੱਲਾਂ ਮੈਂ ਤੇ ਦੁਬਾਈਓ। ਤਾਂ ਵੇਰੇ ਬੰਦੇ ਤੇ ਕਰੀਆਂ ਉਹ ਚੋਂ ਆਪ ਨੂੰ ਦੁੱਖ ਨਿਕਲੇ। ਸੋ ਗਤੀ ਪੈਦਾ ਹੋਇਆ ਉਹ ਜੋ ਜਦੋਂ ਇਹ ਗੱਲ ਸਮਝ ਆ ਜਾਂਦੀ ਹੈ ਫਿਰ ਮਨ ਚ ਪਹੁੰਚ ਜਾਂਦਾ ਹੈ ਮਨ ਵੱਡੇ ਨੂੰ ਆਪਣੀ ਗੱਲ ਬਰੋਦਾ ਹੀ ਨਹੀਂ ਆਪਣੀ ਗੱਲ ਤੋਂ ਨਫ਼ਰਤ ਹੋ ਜਾਂਦੀ ਹੈ ਉਹਨੂੰ ਆਪਣੀ ਗੱਲ ਵਿੱਚ ਆਪਣੀ ਵਰਜੀ ਵਿੱਚ ਜਦੋਂ ਮਨ ਨੂੰ ਆਪਣਾ ਕਾਲ ਦਿਖਣ ਲੱਗ ਜਾਂਦਾ ਹੈ ਕਲਪਨਾ ਦੇ ਆਪਣਾ ਕਾਲ ਦੇ ਸਿਧਾਣਾ ਕਾਲ ਕਲਪਨਾ ਕਾਲ ਨੂੰ ਬੰਦ ਹੈ ਫਿਰ ਛੱਡਦਾ ਕਲਪਨਾ ਨੂੰ ਬਲ ਕਲਪਨਾ ਨੂੰ ਛੱਡ ਸਕਦਾ ਮੋ ਠੀਕ ਹੈ ਜੀ ਉਹ ਨਾਲ ਜੱਲ ਛੱਡਦਾ ਹਾਂ ਜੀ ਨਾ ਕਿਛ ਮਰੇ ਨਾ ਜਾਏ ਲੱਗ ਜੇ ਮਰੇ ਨਾ ਨਾ ਕਿਛ ਮਰੇ ਨਾ ਜਾਏ ਦੋ ਗੱਲਾਂ ਕਠੀਲ ਦੇ ਮਰਨ ਕਟਿਆ ਹੋਇਆ ਤੇ ਜਾਣਾ ਵੀ ਕਿਤੇ ਨਹੀਂ ਸਰਬਿਆਪੀ ਹੈ ਜਾਣਾ ਕਿੱਥੇ ਮੈਂ ਕਹਿੰਦਾ ਨਾ ਗੁਰਮੁਖ ਜਾਨ ਸਮਾਰ ਦਰਗਾਹ ਚੱਲਿਆ ਉਹ ਗੱਲ ਦਾ ਕੀ ਬਣੂਗਾ ਭਾਈ ਗੋਜ਼ਾਰ ਦੀ ਦਾ ਕਹਿੰਦਾ ਨਾ ਨਾ ਕਿ ਜਮਰੇ ਨਾ ਜਾਏ ਕਹਿੰਦੀ ਹੈ ਬਾਣੀ ਤਾਂ ਉਹ ਗੁਰਮੁਖ ਜਨੂਨ ਸੁਵਾਲ ਦਰਗਾ ਚੱਲਿਆ ਤਾਂ ਕੀ ਬਣੂ ਗੁਰਮਤਿ ਖਿਲਾਫ ਹੈ ਗੱਲ ਗੁਰਮੁਖਾਵਣ ਦੀ ਆਵਣ ਚ ਆ ਹੈ ਗੁਰਮੁਖ ਦਾ ਹੋਣਾ ਨਾ ਕਟਿਆ ਗਿਆ ਉਹ ਕਹਿੰਦਾ ਦਰਗਾ ਚੱਲਿਆ ਜੋ ਕਬਰ ਡਾਇ ਇਹਦੇ ਕਹਿੰਦਾ ਪੈਸੀ ਭੁਗਤਣ ਚਲੇ ਫੇ ਪਾਵੇ ਨਹੀਂ ਬਣਦਾ ਕਿ ਜਦ ਮੰਨ ਤੋਂ ਹੀ ਮਨ ਮੰਨ ਗਿਆ ਤਾਂ ਕੁਝ ਮਰਿਆ ਨਹੀਂ ਹੈ ਜਿਵੇਂ ਆਪਾਂ ਕਹਿੰਦੇ ਮਨ ਮਰਦਾ ਨਹੀਂ ਹੈ ਸਮਾਉਂਦਾ ਹੀ ਨਾ ਕਿ ਜਿਵੇਂ ਮਰਨਾ ਜਾਏ ਪਹਿਨਾ ਪਹਿਲਾ ਮਰਨ ਵਾਲੀਆਂ ਛੋਟੀ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਮਰਦੀਆਂ ਨੇ ਕ੍ਰਿਸ਼ਨਾ ਮਰਦੀ ਹੈ, ਕਰੋਧ ਮਰਦਾ ਹੈ, ਔਗਣ ਮਰਦੇ ਨੇ ਫੇਰ ਵਾਲੀ ਕੋਈ ਚੀਜ਼ ਰਹੀ ਹੋਈ ਨਹੀਂ ਅੰਦਰ ਔਗਣ ਮਰ ਗਏ ਕੋਈ ਚੀਜ਼ ਬਚੀ ਨਹੀਂ ਹਾਂਜੀ ਔੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਇਹ ਤਾਂ ਕਾਇਆ ਵਾਲੇ ਸ਼ੇਰ ਨੂੰ ਕਹੀ ਜਾਂਦੇ काया ਤਾਂ ਕੋਟ ਹੈ ਤੇਲਾ ਛੂਲੀ ਜਗਲ ਬੱਗਾ ਪਾਈ ਪਰ ਅਪਾਰ ਹੈ ਉਹਦਾ ਪਰਲਾ ਪਾਸਾ ਹੀ ਨਹੀਂ ਆਇਆ ਤਾਂ ਕੋਟ ਦਾ ਉਹ ਸਰੀਰ ਨੂੰ ਕਾਇਆ ਕਿ ਜਦ ਸਰੀਰ ਤਾਂ ਮਾਇਆ ਆ ਹੈ ਅਸਲ ਚ ਕਾਇਆ ਅੱਜ ਦੇਹੀ ਦੀ ਜਿੱਦ ਕੀ ਕਾਇਆ ਕੀ ਹੁੰਦੀ ਹੈ ਕੁਰਬਾਨੀ ਦੀ ਕੁਰਬਾਨੀ ਕਾਇਆ ਇਹਦੇ ਵਿੱਚ ਹੀ ਦੇਰ ਵਿੱਚ ਉਹ ਆਇਆ ਕੋਰਟ ਦੇ ਕਾਇਆ ਦੇ ਕਿ ਦੇਲ ਨੂੰ ਸੰਯੋਗ ਕਹਿੰਦੇ ਹੈ ਉਹਨਾਂ ਦਾ ਜੋਗ ਹੈ ਜੋਗ ਮਾਇਆ ਵਾਲਾ ਨਹੀਂ ਹੁੰਦਾ ਸੰਯੋਗ ਹੈ ਮਾਇਆ ਦਾ ਰੀਨ ਮਾਇਆ ਦੇ ਵਿੱਚ ਹੁੰਦਾ ਐਕਸਰਸਾਈਜ਼ ਹੈ ਸਰੀਰ ਦੀ ਉਹ ਕੁਛ ਨਹੀਂ ਹੈ ਸਰੀਰ ਦੀਆਂ ਬਿਮਾਰੀਆਂ ਨਾਲ ਆਜੂ ਜੇ ਹੋਵੇ ਵੀ ਕਿ ਜਦੋਂ ਆਉ ਹੋਏ ਜਾਂ ਐਕਸਰਸਾਈਜ਼ ਸ਼ਕਤੀ ਠੀਕ ਹੋ ਨਾਲ ਜੁੜਨਾ, ਨਾਲ ਜੁੜਨਾ, ਦੀ ਗੱਲ ਨਹੀਂ ਹੈ। ਕਿਤੇ ਦੀ ਗੱਲ ਨਹੀਂ ਹੈ ਕਿਤੇ ਗੁਰਬਾਣੀ ਦੀ। ਪਰਮਾਤਮਾ ਇੱਕ ਹੈ। ਕਿ ਉਹਦੇ ਨਾਲ ਮਿਲ ਕੇ ਜਾ ਕੇ ਕਰਣਾ ਹੀ ਨਹੀਂ ਉਹਨੇ। ਜੁੜ ਹੋ ਜੂਗਾ ਫਿਰ। ਜਿਆਦਾ ਹੈ ਜੁੜ ਲੋ ਜੂ। ਤੇ ਤੇ ਮਰੇ ਜੂ। ₹100 ਮੇਰੇ ਕੋਲ ਅੜਿਆ ਨਹੀਂ ਹੋਰ ਪਾਤੀ। ਜਾਂ ਚਲੋ ਸੋਨਾ ਹੀ ਇੱਕ ਟੋਲਾ। ਉਹਦੇ ਨਾਲ ਦੋ ਰਤੀਆਂ ਹੋਰ ਜੋੜਤਾ। ਲੈ ਆਕੇ ਛਾੜ ਕੇ ਵਿੱਚ ਪਾਤਾ। ਉਹ ਟੋਲੇ ਦਾ ਫੇਰ ਇਹ ਹੀ ਨਾ ਉਹ ਤਾਂ ਵੱਧ ਗਿਆ। ਛੱਡ ਲਿਆ ਤਾਂ ਛੱਡ ਗਿਆ। ਉਦੋਂ ਗੱਲ ਆ ਸਮਝਣ ਵਾਲੀ। ਇਹ ਗੱਲ ਆ ਵਿਚਾਰਨ ਵਾਲੀ। ਇੱਥੇ ਉਰਜੇ ਨੇ ਸਾਰੀਆਂ ਮੱਤਾਂ ਦੁਨੀਆ ਦੀ ਇੱਥੇ ਉਰਜੇ ਪਈਆਂ ਨੇ। ਸੋਇ ਨਾਲ ਜੋਗ ਹੈ। ਅੱਛਾ ਆਪਣੇ ਆਪ ਨਾਲ ਜੁੜਿਆ ਹੈ ਆਪਣੇ ਆਪ ਦੇ ਪੈਰ ਕੋਹੜਾ ਮਾਰ ਕੇ ਦੋਹੇ ਸੀ ਜੋ ਇਹਨੂੰ ਭੰਗ ਕੀਤਾ ਸੀ ਸਾਇ ਭੰਗ ਕੀ ਹੈ ਇਹਦੇ ਕੋ ਪਾਵਰ ਹੈ ਸੋ ਇਹਨੂੰ ਭੰਗ ਕੀਤਾ ਤੀ ਜੀ ਜੋ ਨਾਲ ਜੋਗ ਕੀਤਾ ਹੈ ਪੈਰ ਕੋਹੜਾ ਮਾਰਿਆ ਸੀ ਜੋ ਪਾਗ ਹੋਇਆ ਸੀ ਜੋ ਪਾਗ ਹੋਇਆ ਸੀ ਹੁਣ ਆਪਣੇ ਅੰਦਰ ਆਪੇ ਕਾਲ ਸਵਾਲ ਲੈ ਹੋ ਗਿਆ ਜੁਗੀ ਆਪਣੇ ਆਪ ਨਾਲ ਜੁੜਿਆ ਹੋਇਆ ਹਾਂ ਜੀ ਕਾਇਆ ਅੰਦਰ ਆਪ ਵਸ ਰਿਹਾ ਆਪੇ ਰਸ ਭੋਗੀ ਕਾਇਆ ਦੇ ਅੰਦਰ ਆਪੇ ਬਸ ਰਿਹਾ ਆਪ ਕੋਣ ਹੈ ਜੀ ਆਪ ਹੈ ਹ ਸੁਣਵੇ ਸੁਗਤ ਬੈਠੀ ਹੈ ਹਜ਼ਾਰਾਂ ਦੀ ਦਰਦ ਦੇ ਵਿੱਚ ਗੁਰਬਾਣੀ ਦਾ ਸ਼ਬਦ ਆਇਆ ਕਾਇਆ ਅੰਦਰ ਆਪ ਬੈਠਾ ਹਰ ਇੱਕ ਦੇ ਅੰਦਰ ਬੈਠਾ ਠੀਕ ਹੈ ਇੱਥੇ ਅਨੇਕ ਤਰੀਕੇ ਲਾ ਰਹੀ ਹੈ ਜੀ ਹਾਂ ਜੋ ਪਾਏ ਜੋ ਜੋਤ ਹੈ ਸੋਈ ਸਾਰੇ ਜੀਉਦੋ ਆਪੇ ਰਸ ਖੋਗੀ ਇੱਕ ਦੇ ਰੂਪ ਚ ਹੈ ਸਾਰਿਆਂ ਦੇ ਵਿੱਚ ਘਟ ਨਹੀਂ ਹੈ ਜਿਵੇਂ ਜਮਾਨ ਕੇ ਬਿਖੇਸ ਜੋਤ ਹੈ ਬਾੜ ਹੈ ਨਾ ਘਾਟ ਹੈ ਨਾ ਘਾਟ ਬਾੜ ਹੋਤ ਹੈ ਪਿਆ ਜਾਗਦਾ ਫਿਰ ਗਿਆਨ ਜਿਨ੍ਹਾਂ ਗਿਆਨ ਹੈ ਉਹਨਾਂ ਜਾਗਦਾ ਹੈ ਜਿਨ੍ਹਾਂ ਸੁਤਾ ਪਿਆ ਉਹਨਾਂ ਗਿਆ ਇਹਨੂੰ ਗਿਆਨ ਤਾਪਲਾ ਸੁਤਾਪੇ ਠੀਕ ਹੈ ਫੈਕ ਪੂਰਾ ਅਵਸਥਾ ਦਾ ਫਰਕ ਹੋਰ ਕੁਛ ਨਹੀਂ ਹਾਂਜੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਆਪ ਅਤੀਤ ਅਲਿਪਤ ਹੈ ਜਿਹੜਾ ਚਿਤ ਹੈ ਆਪ ਹੈ ਅਤੀਤ ਸਾਥਾ ਲੈਣਾ ਉਹ ਹਾਂਜੀ ਅਤੀਤ ਉਹ ਗਾ ਬੰਦੇ ਉਹਦੇ ਵਿੱਚ ਸਮਾਉਣਾ ਹੈ ਬੰਦੇ ਉਹਦਾ ਰੂਪ ਬਣ ਜਾ भन्ने वाला रूप पडलो ज्याके वोने मंदा रूप दिखो पावे मंदा रूपो ने ओदे विचो दिखया होया जरूर है रूप ता ओ अतीत चित अतीत है आप अतीत अने पता है महाराज ने पता नहीं है। होता है क्या है ओदा ही है आधा अतीत है आधा अतीत भी है चित्त सा लेता है अतीत होके अलग होके महाराज ਸ਼ਕਤੀ ਚਤ ਕੋੜ ਹੈ ਕੋੜ ਕੋਲ ਕੋਈ ਸ਼ਕਤੀ ਨਹੀਂ ਠੀਕ ਹੈ ਕੋੜ ਕੋ ਸੋਣ ਦੀ ਦੇਖਣ ਦੀ ਸ਼ਕਤੀ ਥੋੜੀ ਜਿਹੀ ਬੁੱਧੀ ਹੈ ਸਮਝਣ ਵਾਲੀ ਦੀ ਹੈ ਕੋੜ ਬਹੁਤੀ ਸ਼ਕਤੀ ਨਹੀਂ ਫਿਰ ਵੀ ਬਾਗੀ ਹੈ ਆਪ ਹਰ ਜੋਗੀ ਹਰ ਹੈ ਜੁੜਿਆ ਨਹੀਂ ਕਿਸੇ ਨਾਲ ਵੀ ਉਹ ਆਇਆ ਨਾਲ ਨਹੀਂ ਜੁੜਿਆ ਆ ਹਮਮ ਲਿਪਤ ਕਰਕੇ ਮਾਇਆ ਨਾਲ ਜੁੜਿਆ ਆ ਕਿਸੇ ਨਾਲ ਜੁੜਿਆ ਹੈ ਹਰ ਜੋਗੀ हर जोगी ਵੀ ਹੈ ਨਰ yog ਵੀ ਹੈ ਮਾਇਆ ਬਣੀ है yog ਹੈ। ਸਾਚ ਖੰਡਾਣ ਡੋ ਰਿਆ ਹੈ। ਹਰ ਹਰਕਤ ਬੋਧੀ ਹਰ ਗੱਲ ਮੰਦੀ ਦਾ ਭੇਦ ਸੱਚਾ ਢੂ ਦੇ ਰਿਹਾ। ਤੇ ਇਹਦਾ ਹਰ ਭੇਦ ਉਹ ਤੇ ਬਚਾ ਰਹੇ। ਤੇ ਇਹ ਹਰ ਕਿਸ ਹੁੰਦੀ ਸੀ ਆਈਡੀ करे ਰਿਹਾ। ਜੋ ਤਿਸ ਭਾਵ ਹੈ ਸੋ ਕਰੇ ਹਰ ਕਰੇ ਸੋ ਹੋਗੀ। ਜੋ ਤਿਸ ਪਰ ਆਪਣੀ ਜਾਨ ਦਾ ਜੋ ਮਨ ਨੂੰ ਭਾਉਂਦਾ ਉਹ ਕਰਦਾ ਪਰ ਹੁੱਡਾ ਉਹ ਹੈ ਜਿਹੜਾ ਹੱਲ ਨੂੰ ਭਾਉਂਦਾ ਆਮੇ ਬਾਨੋ ਜੋ ਜੋ ਚਾਹੁੰਦਾ ਉਹ ਕਰਦਾ ਪਰ ਹੁੱਡਾ ਉਹ ਹੈ ਕਰੇ ਜੋ ਹੋਗੀ ਹੋਗੀ ਕਿ ਹਰ ਕਰੇ ਹਰ ਕਰੇ ਜੋ ਤੇ ਭਾਵੇਂ ਸੋ ਕਰੇ ਮਨ ਨੂੰ ਜੋ ਭੁੰਦਾ ਕਰਦਾ ਉਹ ਹੈ ਆਪਣੀਆਂ ਛਾਲਾਂ ਸਭ ਨੇ ਛਾਲਾ ਮਾਰੀਆਂ ਕਰਤਾ ਕਰੇ ਜੋ ਹੋਏ ਬੁਧੀਆਂ ਛਾਲਾ ਮਾਰਦਾ ਕੁੱਡੀਆਂ ਸਿਧੀਆਂ ਕਦੇ ਕਰਦੋਂ ਬੁਲਾ ਮੈਂ ਕਰਦੂਗਾ ਪਰ ਜੋ ਹੱਲੋਂ ਪੁੱਛਦਾ ਉਦੋਂ ਹੋਈ ਹੈ ਠੀਕ ਹੈ ਹਰ ਫਿਰ ਵੀ ਪਾਉਂਦਾ ਜੀ ਕਦੇ-ਕਦੇ ਇਹ ਤਾਂ ਉਹਨੂੰ ਪੁੱਛਿਓ ਜਾਗੇ ਮੈਨੂੰ ਉਹਦੇ ਬਾਰੇ ਜੁਮਾ ਕਿਹਦੇ ਤੇ ਆਉਂਦਾ ਫਿਰ ਹਰਤੇ ਹੈ ਹੋਰ ਮੰਨ ਕੇ ਅੱਛਾ ਪਰ ਇਸ ਜਨਮ ਵਿੱਚ ਆ ਕੇ ਹਰ ਲਈ ਚਾਉਂਦਾ ਨੁਕਸਾਨ ਹੋਵੇ ਬੁੱਦੀ ਵਜਾ ਨਾਲ ਨੁਕਸਾਨ ਹੁੰਦਾ ਬਹੁਤ ਬੇਕਾਬੂ ਹੈ ਹਰ ਕੀ ਜੇ ਕਾਬੇ ਫਿਰ ਵੀ ਜੋ ਹਰ ਕਰੂਗਾ ਉਹੀ ਹੋਣਾ ਚਾਹੀਦਾ ਹੈ ਤਾਂ ਸੱਚ ਕਰਨ ਨਾਲ ਜੁੜਿਆ ਹੋਇਆ ਹੈ ਹੈ ਉਹ ਸੱਚ ਖਾਣ ਦਾ ਅੰਸ਼ਾਰੀ ਹੈ ਅਸਲ ਇਹ ਜੋ ਸੱਚ ਕਰਨ ਓਹੀ ਮੈਂ ਉਹ ਹੀ ਉਹ ਹੀ ਹੁੰਦਾ ਉਹ ਹੀ ਹਰ ਚਾਹੁੰਦਾ ਸਾਨੂੰ ਤਾਂ ਉਹੀ ਜੱਗ ਮੈਨੂੰ ਲੱਗਦਾ ਹੈ ਰਾਵਣ ਦਾ ਪਰ ਅੰਤ ਦੇ ਨਾਲ ਨਾਲ ਜੁੜਿਆ ਹੋਇਆ ਕੋਈ ਉਹਦਾ ਜੇ ਰਾਮਚੰਦ ਹੈ ਉਹ ਕੋਈ ਵੀ ਛਿੜ ਜਾਉਣਾ ਹੈ ਭਾਈ ਜੇ 라ਵਣ ਦਾ ਹੀ ਆ ਪਿਆ ਹੋਵੇ ਉਹਦੀ ਨਹੀਂ ਰੌਣਾ ਇਸ ਗੱਲ ਕੰਮ ਕਰਦਾ ਫਿਰ ਉਹ ਨਾਲ ਉਹ ਬੁੱਢੇ ਸਕੂਟਰ ਚੱਕੜ ਚੋਰੀਆਂ ਗੱਲਾਂ ਕਰਦੇ ਕਹਿੰਦੇ ਸਾਡਾ ਨੂੰ ਉਹ ਵਾਰਾਂ ਸਾਡਾ ਕੋਈ ਨਹੀਂ ਕਰੀ ਗੱਲੂ ਆਪੇ ਗੁਕਤੂ ਠੀਕ ਹੈ ਜੀ ਹਰ ਗੁਰਮੁਖੀ ਨਾਮ ਧਿਆਈਐ ਲਹ ਜਾਹੇ ਵਿਯੋਗੀ ਇਹ ਗੁਰੂ ਗ੍ਰੰਥ ਸਾਹਿਬ ਵਾਰੇ ਹਰ ਵਾਰੇ ਗੁਰਬਖਸ਼ ਨੇ ਦੱਸਿਆ ਕੁਛ ਔਰ ਹਰ ਬਾਰ ਮੂਰਤੀ ਪੱਥਰ ਦੀ ਬਣਾਈ ਬੈਠੇ ਨੇ ਕਿਹਨ ਦੀ ਉਹਨੂੰ ਹਰ ਕਹਿੰਦੇ ਨੇ ਉਹਦੀ ਪੂਜਾ ਕਰਦੇ ਨੇ ਵੀ ਦੀ ਮੂਰਤੀ ਨੂੰ ਹਰ ਕਹਿੰਦੇ ਨੇ ਪਰ ਇੱਕ ਗੁਰਬਖਸ਼ ਨੇ ਵੀ ਹਰ ਦੱਸਿਆ ਅਰਦਾਸ ਗਿਆਨ ਦਿੱਤਾ ਇਕ ਦੁਨੀਆ ਵੀ ਅਰਦਾਸ ਗਿਆਨ ਦੇ ਰਹੀ ਹੈ ਵੀ ਆਹ ਮੂਰਤੀ ਨਾਲ ਨੂੰ ਇਸ਼ਾਨਦ ਕਰਾਈ ਹੈ ਜੀ ਹੰਦੇ ਕੱਪੜੇ ਪੁਆਈਏ ਹੰਦੇ ਪੂਜਾ ਕਰੀਏ ਆਲੂ ਕੋ ਉਗਲਵਾਈਏ ਆ ਰਹਾ ਵਾਰ ਉਸ ਬੇੜੇ ਗੱਲਾਂ ਲਿਖੀਆਂ ਹੋਈਆਂ ਨੇ ਦੋ ਹਰ ਖੜੇ ਕੀਤੇ ਹੋਏ ਨੇ ਇੱਕ ਵਾਰ ਮੂਰਤੀ ਖੜੀ ਕੀਤੀ ਹੈ ਇੱਕ ਗੁਰਮੁਖੀ ਦਾ ਸਿਆਹ ਹਰ ਜਿਹੜਾ ਗੁਰਮੁਖੀ ਹਰ ਨਾ ਮੈਨੂੰ ਜੇ ਉਹ ਤੇ ਉਹੋ ਹੀ ਤੇ ਉਹ ਜੋੜੀਏ ਲੈ ਜਾਏ ਬਸ ਆ ਜਿਹੜਾ ਵਿయోగ ਹੈ ਨਾ ਤੇ ਤਰਬੁਧਾ ਦੂਰ ਹੋ ਜਾਂਦਾ ਫਿਰ ਸੁਜੋਗ ਹੋ ਜਾਂਦਾ ਮੂਰਤੀ ਦੇ ਰੋਜ਼ ਦਰਸ਼ਨ ਕਰੀ ਜਾ ਵਿਯੋਗ ਰਹੂਗਾ ਉਹ ਜਿਹੜਾ ਗੁਰਮਖਾਹ ਹਾਰਾ ਉਹ ਨਾਲੇ ਰਲਾ ਲੈਂਦਾ ਕਰ ਲੈਂਦਾ ਮੂਰਤੀ ਨਹੀਂ ਕਰ ਸਕਦੀ ਲੀਡ ਨਾਲ ਜਿਸਨੂੰ ਕਿਤਾਹ ਦੇ ਹਨੂ ਦਰਸ਼ਨ ਕੋਈ ਲੀਡ ਮੂਰਤੀ ਚ ਹੋਇਆ ਤਾਂ ਕਿਸੇ ਨੂੰ ਕਿਤਾਹ ਤਾਂ ਕੋਈ ਇਹਦੀ ਕਥਾ ਔਰ ਉਹਦਾ ਵਿਯੋਗ ਦੂਰ ਕਰ ਦਿੰਦਾ ਜੋਗ ਇਹ ਹਲ ਨਾਲਾ ਸਾਡਾ ਫਿਰ ਵਿਯੋਗੀ ਦਾ ਵਿਯੋਗ ਦੂਰ ਹੋ ਜਾਂਦਾ ਸੁਜੋਗ ਇਹਦੇ ਨੂੰ ਸੁਜੋਗ ਕਹਿੰਦੇ ਨੇ ਹਰਦੇ ਵਿੱਚ ਸਮਾ ਜਾਣਾ ਹਰਦੇ ਨਾਲ ਜੁੜ ਜਾਣਾ ਹਰਦੇ ਚੜ੍ਹਦੀ ਲਗ ਜਾਣਾ ਬੇਸ਼ਾਬਾਸੀ ਹੀ ਤਾਂ ਸੁਜੋਗ ਹੈ ਹਰ ਹੀ ਤੇ ਦਾ ਮੂਲ ਹੈ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਘਟ ਘਟ ਵੀ ਹਾਜੂ ਬਸ ਸੰਤਰ ਕਹੋ ਪੁਕਾਰ ਤੇਰਾ ਬੁਖਾਰ ਉੱਚੀ ਆਵਾਜ਼ ਫੁਰਦਰ ਰੌਲਾ ਪਾਇਆ ਉਹ ਹਰ ਦਰਬਸਦ ਦਰਬਸਦ ਫੇਲੀ ਬੰਦੇ ਫਿਰ ਬਾਹਰ ਬਣ ਲਈ ਬੈਠੇ ਨੇ ਲੈ ਲੋ ਮੱਠੀਆਂ ਉਹ ਮੱਠੀਆਂ ਦਾ ਘਰੋਂ ਪਕਾ ਕੇ ਲੈ ਕੇ ਜਾਂਦੇ ਉਹ ਕਿੱਥੇ ਦਿੰਦਾ ਉਹ ਖਾਂਦਾ ਨਾ ਪਕਾਉਂਦਾ ਆਪੇ ਪਕਾ ਕੇ ਲੈ ਲੈਣ ਲੈ ਜਾਂਦੇ ਆਪੇ ਖਾ ਲੈਣੇ